ਅਖੀਰੀ ਪੰਕਤੀ ਹੈ ਜੀ ਉਹਦੇ ਪੰਜ ਅੱਖਰਾਂ ਵਿੱਚ ਸਭ ਤੋਂ ਪਹਿਲਾ ਅੱਖਰ ਹੁੰਦਾ ਹੈ ਜੀ ਯਈਆ ਹੋਰ ਜੀ ਹੋ ਇਹ ਉਪਦੇਸ਼ ਹੈ ਜੀ ਭਗਤ ਕਬੀਰ ਜੀ ਵੱਲੋਂ ਹਾਂ ਜੀ ਜੋ ਜਾਨੋ ਤੋਂ ਦੁਰਮਤ ਹਨ ਪਰਿਬਸ ਕਾਇਆ ਗਾਉ ਪਰ ਦੁਰਮਤੀ ਹਨ ਬਲਕੇ ਹਨੀ ਦੁਰਮਤੀ ਹਨੀ ਪਰਿਬਾਸੀ ਕਾਇਆ ਗਾਉ ਜੇ ਗਿਆਨ ਹੋ ਗਿਆ ਤਾਂ ਗੁਰਮਤਨ ਆਸ ਬਣਾ ਕਰ ਗੁਰਮਤਨ ਵਿੱਚ ਪਹਿਲਾ ਜਿਹੜਾ ਕਹਿੰਦਾ ਨਾ ਤਵੀਰ ਇੱਕ ਬਰਨ ਤੇ ਦੋਏ ਗੂਏ ਦੋ ਬਰਨ ਤੇ ਚਾਰ ਚਾਰ ਮਾਨ ਤੇ ਕੇ ਬੂਏ ਚਾਰ ਬਰਖ ਦੇ ਨਾਲ ਆ ਜਵਾਬ ਪਿਆ ਪਹਿਲਾ ਦੁਰਬਤ ਸਭ ਤੋਂ ਗੁਰਮਤ ਦੀ ਬਗਦ ਨਾਲ ਗੁਰਮਤ ਦਾ ਨਾਸ ਕਰਦੇ ਫੇਰ ਇਹਦਾ ਕੀ ਹੋਊਗਾ ਕਰ ਬਸ ਕਾਇਆ ਗੋ ਜਿਹੜਾ ਤੇਰਾ ਅੰਦਰ ਹੈ ਨਾ ਕਿਉਂ ਲੀਜੇ ਗੜ ਬੰਦਾ ਭਾਈ ਉਹ ਕਾਇਆ گاؤں ਮੇਰੇ ਕਾਬੂ ਚ ਆ ਜੀ ਕਿਲਾ ਕਾਬੂ ਚ ਆਊਗਾ ਪਹਿਨ ਫਿਰ ਇਲਾਕਾ ਪਹਿਲਾਂ ਕਿਲਾ ਜਾਣਗੇ ਹੋ ਜੀ ਰਣ ਰੂਤੋਂ ਭਾਜੇ ਨਹੀਂ ਸੂਰੋ ਥਾਰੋ ਨਾਉ ਰਣ ਰੂਤੋਂ ਭਾਜੋ ਨਹੀਂ ਰਣ ਦੇ ਵਿੱਚ ਖੜ ਚੜਿਆ ਜਾਵੇ ਜੰਗ ਦੇ ਮੈਦਾਨ 'ਚ ਫਿਰ ਭੱਜੀ ਡਾਵੀ ਹੁੰਦਾ ਸੂਰ ਉਤਾਰਾ ਨਾ ਉਹ ਜਿਹੜੇ ਸੂਰਮੇ ਹੁੰਦੇ ਨੇ ਚਲੋ ਤੂੰ ਸੂਰਮੇ ਨੇ ਤੇ ਭੱਜ ਜਾਂਦੇ ਨੇ ਸੂਰਮੇ ਇਹ ਤਾਂ ਜੰਗ ਦੇ ਕਿ ਫਿਰ ਜੇ ਇੱਕ ਬਸ ਵਿੱਢ ਗਈ ਫਿਰ ਨਹੀਂ ਭੱਜਦੇ ਫਿਰ ਜੰਗ ਜਿੱਤ ਗਈ ਉੱਥੇ ਰਹਿੰਦੇ ਨੇ ਜਿੱਤ ਕੇ ਵੀ ਜਿੱਤ ਕੇ ਗਾਣ ਗੂਏ ਭੱਜਦੇ ਹੁੰਦੇ ਨੇ ਇਹ ਮਰਜਾ ਦੇ ਨੇ ਭੱਜ ਜਾਂਦੇ ਸੂਰਮੇ ਤਾਂ ਜੰਗ ਦੇ ਮੈਦਾਨ 'ਚ ਖੜੇ ਰਹਿੰਦੇ ਨੇ ਜਿਹੜਾ ਕੋਈ ਹੋਰ ਹੈਗਾ ਉਹ ਆਜੋ ਹਾਂਜੀ ਜੀ ਇਹ ਚੌਥੀ ਵੀ ਪੜਦਾ ਉਪਦੇਸ਼ ਈ ਹੈ ਜੀ ਭਗਤ ਕਬੀਰ ਜੀ ਦਾ ਤੇ ਹੁਣ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਜਨਮ ਨ ਹੋਵੀ ਕਦੀ ਜੇਕਰ ਸੱਚ ਪਛਾਣੈ ਗੁਰਮੁਖੀ ਅੱਖ ਗੁਰਮੁਖੀ ਬੁੱਝੈ ਗੁਰਮੁਖੀ ਇੱਕੋ ਜਾਣੈ ਯਈ ਨਾਲ ਕਹਿੰਦੇ ਤੇਰਾ ਜਨਮ ਨਹੀਂ ਹੋ ਸਕਦਾ ਕਦੇ ਵੀ ਜੇ ਤੂੰ ਸੱਚ ਨੂੰ ਪਛਾਣਵੇਂ ਜੇਕਰ ਸੱਚ ਪਛਾਣੈ ਜੇ ਕੋਈ ਸੱਚ ਨੂੰ ਪਛਾਣ ਲਵੇ ਜਨਮਰੀ ਹੋ ਸਕਦਾ। ਹੋ ਜੀ। ਗੁਰਮੁਖੀ ਆਖ ਹੈ, ਗੁਰਮੁਖੀ ਬੁੱਝਿਆ, ਗੁਰਮੁਖੀ ਇੱਕੋ ਜਾਣ। ਹਾਂ ਗੁਰਮੁਖੀ ਆਖ ਹੈ, ਗੁਰਮਖਾਨੀ ਇਹ ਗੱਲ ਆਖੀ ਹੈ, ਠੀਕ ਹੈ ਜੀ। ਤੀਸਰੇ ਪਾਸ਼ਾ ਦਾ ਕੋਈ ਉਪਦੇਸ਼ ਨਹੀਂ ਹੈ ਜੀ, ਕਿ ਇਹ ਤੋਂ ਹੁਣ ਹਾਂ ਗੁਰਦੀ ਅਖਰੀ ਮਹਲਾ ਪੰਜਵਾਂ ਦੋ ਉਪਦੇਸ਼ ਹੈ ਜੀ। 41ਵੀਂ ਪੌੜੀ ਚ ਹੈ ਜੀ ਉਸ ਤੋਂ ਬਾਅਦ ਹੈਗਾ ਜੀ 43ਵੀਂ ਪੌੜੀ ਚ ਅੱਛਾ 41ਵੀਂ ਪੌੜੀ ਦਾ ਉਪਦੇਸ਼ ਹੈਗਾ ਜੀ ਪੌੜੀ ਜਾਰੋ ਦੁਰਮਤ ਦੋ ਤਿਆਗ ਸੁਖ ਸਹਜੇ ਸੋ ਦੁਰਮਤ ਨੂੰ ਜਾਲ ਦੋ ਯਈਆ ਕਹਿੰਦਾ ਜਾਰੋ ਦੁਰਮਤ ਦੋ ਜਿਹੜੀ ਦੂਜੀ ਪੈਦਾ ਹੋਈ ਹੋਈ ਹੈ ਮਤ ਆਪਣੇ ਅੰਦਰ ਇੱਕਤਾਸੀ ਮਤ ਲੈ ਕੇ ਆਇਆ ਉਹ ਜਿਹੜੀ ਲੈ ਕੇ ਆਇਆ ਸੀ ਮਤ ਤਾਂ ਉਜੀ ਬਾਲ ਬੁੱਧ ਬਾਲ ਬੁੱਧ ਤੇ ਤੂੰ ਹੀ ਚੜ ਬਾਲ ਬੁੱਧ ਬੱਜੂ ਇਹ ਤੇ ਸਹਿ ਤਿਆਗ ਸੁਖ ਸਹਜੇ ਸੌ ਇਹ ਦੁਰਮਦ ਨੂੰ ਤਿਆਗ ਕੇ ਸਹਜ ਸੁਖ ਦੇ ਵਿੱਚ ਨੀਂਦ ਆਊਗੀ ਵਧੀਆ ਵਧੀਆ ਸੌਗਾ ਦੱਪੇ ਨੀਂਦ ਆ ਜੂਗੀ ਟੰਗ ਤੇ ਟੰਗ ਤਰ ਕੇ ਆਰਾਮ ਕਰ ਫੇਰ ਦੁਰਮਤੇ ਦੁਖੀ ਕਰਦੀ ਆ ਉਹੀ ਜਾਂ ਸਾਸ ਕੀ ਦੁਖੀ ਸਸਰ ਕੀ ਪਿਆਰੀ ਅ ਜੀ ਨੂੰ ਕਹਿੰਦਾ ਕਬੀਰ ਸਾਸ ਕੀ ਦੁਖੀ ਸਸਰ ਪਿਆਰੀ ਆ ਨਾ ਇਹ ਦੁਰਮਤੇ ਦੁਬਾਰਾ ਸਮਝਾਓ ਵੀ ਜਈਆ ਜਾਰ ਦੋ ਦਾ ਕੀ ਭਾਵ ਹੈ ਜਿਹੜੀ ਲੈ ਕੇ ਮਤ ਆਇਆ ਸੀ ਉਹ ਵੀ ਹੈ ਜੀ ਦੁਰਮਤ ਦਾ ਰੰਗ ਹੋਰ ਚੜਿਆ ਹੋਇਆ ਥੱਲੇ ਵਾਲਾ ਰਹਿ ਜੂਗਾ अच्छा ਜੀ ਜਿਹੜੀ ਦੂਏ ਨੰਬਰ ਤੇ ਦੁਰਮਤ ਲਈ ਸੀ ਉਹਨੂੰ ਜਾਣੋ ਹੈ ਜੀ ਉਹਨੂੰ ਜਾਣਨਾ ਹੈ ਉਹ ਜਿਹੜੀ ਹੈ اچھا ਜੀ ਦੁਰਮਤ ਹੈ ਜੜੂਗੀ ਦੂਈ বাজੂ ਜੋ বাজੂਗੀ ਉਹ ਸ਼ੁੱਧ ਜੀ ਤੇ ਜਦ ਇੱਕ ਪਹਿਲਾਂ ਵੀ ਉਹਨਾਂ ਸੀ ਨਹੀਂ ਹੋ ਤ ਕੁਛ ਦੋ 12 ਉਹ ਵੀ ਐਸੇ ਭਾਵ ਚ ਸੀ ਨਹੀਂ ਨਹੀਂ ਉੱਥੇ 12 ਦੀ ਹੱਲਾ ਹੈ ਤੇ ਹੋਰ ਗੱਲ ਹੈ ਉੱਥੇ ਹੋਰ ਗੱਲ ਦੂਜੀ ਵਾਰਾ ਇੱਕੋ ਵਾਰੀ ਮਿਲੀ ਆਹਾ ਦੂਜੀ ਜਾਏ ਪਰ ਸੰਤ ਸਰਨਾ ਜਿਸ ਤਰਨਾ ਯਈਆ ਜਾਏ ਪਰ ਸੰਤ ਸਰਨਾ ਕਹਿੰਦੇ ਸੰਤ ਨਹੀਂ ਸਰਦਾ ਸਭ ਬੈਜੋ ਜਿਹਦੇ ਆਸਰੇ ਆ ਭਵਜਲ ਤਰਨਾ ਭਵਜਲ ਉਸ ਸੰਤ ਦੇ ਸਰਨ ਪਏ ਤੇ ਤਰਿਆ ਜਾਊਗਾ ਗੁਰਕੇ ਪਾਣੇ ਚ ਆਜੋ ਪਵ ਜਲ ਕਰਿਆ ਜਾਊਗਾ ਘੁਰਕੇ ਪਾਣੇ ਚ ਰਹਿਣਾ ਸਤ ਸਾਲ ਰਹਿਣਾ ਕੋ ਜੀ ਯਈਆ ਜਨਮ ਨ ਆਵੇ ਸੋ ਏਕ ਨਾਮ ਲੈ ਮਨੇ ਪਰੋ ਉਹ ਜਨਮ ਨਹੀਂ ਆਉਦਾ ਦੁਬਾਰਾ ਜਿਹਨੇ ਇੱਕ ਨਾਮ ਲੈ ਕੇ ਕੋਈ ਹੁਕਮ ਲੈ ਕੇ ਕੋ ਨਾਮ ਹੁਕਮ ਉਹ ਚ ਕਰੋ ਲਿਆ ਆਪਣੇ ਨੂੰ ਹੁਕਮ ਮੰਨ ਲਿਆ ਜੀ ਜਿਹਨੇ ਮੰਨ ਲਿਆ ਉਹ ਪਰੋਇਆ ਗਿਆ ਜਿਹਨੇ ਪਾਣਾ ਮੰਨ ਲਿਆ ਉਹਦਾ ਦਵਾਰਾ ਜਨਮ ਨਹੀਂ ਹੁੰਦਾ ਹਾਂਜੀ ਯਈਆ ਜਨਮ ਨਹ ਹਾਰੀਐ ਗੁਰਪੂਰੇ ਕੀ ਤੀਕ ਨਾਨਕ ਤਹਿ ਸੁਖ ਪਾਇਆ ਜਾ ਕੇ ਹੀਰ ਐ ਇਕ ਆਹ ਇਹਨਾਂ ਗੁਰਪੂਰੇ ਦੀ ਤੀਕ ਆ ਉਹ ਜਨਮ ਨਹੀਂ ਹਾਰਦਾ ਕਦੇ ਵੀ ਹਾਂਜੀ ਨਾਨਕ ਤਹਿ ਸੁਖ ਪਾਇਆ ਜਾ ਕੇ ਹੀਰ ਐ ਇਕ ਜਿਹਦੇ ਹਿਰਦੇ ਹੋ ਗਿਆ ਉਹ ਸੁਖੇ ਸੁਖ ਚ ਠੀਕ ਹੈ ਜੀ ਕਹਿੰਦਾ ਭਾਪ ਸਾਰਾ ਸੁੱਖ ਇੱਕ ਹੋਣ ਚ ਹੈ ਜਿਹੜਾ ਇੱਕ ਹੋ ਗਿਆ ਉਹ ਫਿਰ ਅੱਗੇ ਉਹਨੂੰ ਜਨਪਦਾਰਥ ਮਿਲ ਜਾਂਦਾ ਹੈ ਜੀ ਏਕਤਾ ਵਿੱਚ ਸੁਖੇ ਸੁਖ ਹੈ ਠੀਕ ਹੈ ਜੀ ਹੁਣ ਹੈ ਜੀ 48ਵੀਂ ਪੌੜੀ ਦਾ ਉਪਦੇਸ਼ ਹੈ ਜੀ ਯਹੀ ਅੱਖਰ ਤੋਂ ਪੌੜੀ ਯਈਆ ਯਤਨ ਕਰਤ ਇਸ ਤਰੀਕੇ ਨਾਲ ਆਤਮਦਰਸ਼ਨ ਹੋ ਜੂ ਲੋਗ ਦੇ ਬਿਨਾ ਨਾਮ ਦੇ ਬਿਨਾ ਅੰਦਰਲੀ ਅੱਖ ਦੀ ਖੁੱਲ੍ਹੀ ਨਾਮ ਦੇ ਬਿਨਾ ਜਿਹੜਾ ਉਹ ਸੂਤਕ ਲੱਗਿਆ ਹੈ ਨਾ ਅੱਖ ਨੂੰ ਨਾਨਕ ਸੂਤਕ ਹੈ ਉਤਾਰੇ ਤੋਂ ਹੈ ਦਰਸ਼ਨ ਨਹੀਂ ਹੋਣਾ ਸਿੱਧੀ ਨਹੀਂ ਪ੍ਰਾਪਤ ਹੋਣੀ ਸਿੱਧੀਆਂ ਇਹ ਤਾਂ ਨਹੀਂ ਪੜਨਾ ਸਿੱਧੀਆਂ ਇਹਨੇ ਸਿੱਧੀਆਂ ਬਹੁਤ ਹੈ ਸਿੱਧੀਆਂ ਇੱਕੋ ਬਚਨ ਸਿੱਧੀਆਂ 18 ਮਨ ਜਾਣੀਏ ਫਿਰ ਇਹ ਕਾਫੀਆ ਪੂਰਾ ਕਰਨ ਨੂੰ ਲਿਖਿਆ ਹੈ ਸਿੱਧਿਆ ਦਾ ਮਤਲਬ ਹੋਣਾ ਸੁਰਜੇ ਨਾਲ ਜਿਹੜਾ ਉੜ ਗਿਆ ਕਹਿੰਦੇ ਨੇ ਕਰਤ ਬਹੁ ਏਕ ਨਾਮ ਬਿਨ ਕਹਿ ਲੋ ਸਿੱਧਿਆ ਕਹ ਬਹੁਤ ਯਤਨ ਕੀਤੇ ਨੇ ਤਣਾ ਤਣਾ ਦੇ ਯਤਨ ਕੀਤੇ ਨੇ ਏਕ ਨਾਮ ਬਿਨ ਕਹਿ ਲੋ ਸਿੱਧਿਆ ਇੱਕ ਨਾਮ ਤੋਂ ਬਿਨ ਸਮਝ ਕਿਵੇਂ ਆ ਜਾਂਦੀ ਜਿਹੜਾ ਅੰਦਰੋਂ ਸੂਤਰ ਲੱਗਿਆ ਹੋਆ ਸੀ ਜਾਲਾ ਸੀ ਪਰ ਉਹਦਾ ਜਿਹਨਾਂ ਚੋਂ ਉਹ ਦੂਰ ਨਿਕਲਦਾ ਦਰਸ਼ਨ ਕਿਵੇਂ ਹੋਊ ਹੋ ਜੀ ਯਾਹੂ ਯਤਨ ਕਰ ਨਾਮ ਦੀ ਪ੍ਰਾਪਤੀ ਹੀ ਯਤਨ ਹੈ ਇਹਦੇ ਨਾਲੇ ਛੁਟਕਾਰਾ ਹੈ ਨਾਮ ਲੈ ਲੈ ਇਹ ਹੀ ਯਤਨ ਨਾਲੇ ਛੁਟਕਾਰਾ ਵਾਹੂ ਯਤਨ ਸਾਧ ਸੰਗਾਰਾ ਇਹ ਜਤਨ ਸਾਧ ਦੀ ਸੰਗਤ ਕੋ ਨਹੀਂ ਪੂਰਾ ਹੁਣ ਸਾਧ ਦੀ ਸੰਗਤ ਨਾਲ ਹੀ ਜਤਨ ਹੋਊਗਾ ਇਹ ਤੇ ਜਤਨ ਵੀ ਸਾਧ ਦੀ ਸੰਗਤ ਨਾਲ ਹੁੰਦਾ ਹੈ ਛੁਟਕਾਰੇ ਵਾਲਾ ਨਾਮ ਸਾਧ ਦੀ ਸੰਗਤ ਬਿਨਾ ਪ੍ਰਾਪਤ ਨਹੀਂ ਹੋਣਾ ਇਹ ਜਤਨ ਬਿਨਾ ਛੁਟਕਾਰਾ ਯਤਨ ਕਰ ਰਹੇ ਨੇ ਸਾਰੇ ਕੁਝ ਨਾ ਕੁਝ ਕਰ ਰਹੇ ਨੇ ਵੀ ਬਾਹਰ ਪਾਪਸਾਨ ਦਾ ਡੁੱਬੇ ਹੋਇਆ ਉੱਪਰ ਜੀਏ ਬਾਹਰ ਵਾਹੀ ਨਾ ਪਹ ਪਰ ਕੋਈ ਉੱਪਰ ਆ ਨਹੀਂ ਤੱਕ ਉੱਪਰ ਨਹੀਂ ਸਕਦਾ ਕੋਈ ਵੀ ਉੱਪਰ ਨਹੀਂ ਹੋਣਾ ਗੜਬੜ ਨਹੀਂ ਹੋਣਾ ਸਾ ਨਹੀਂ ਹੋਣਾ ਡੁੱਬਿਆ ਹੀ ਰਹੇਗਾ ਉਹ ਜੀ ਤਰਨ ਤारण ਸਮਰਾਥਾ rakh liyo nirgun ਨਰਨਾਥਾ ya ho tan tan samrath eh na mai tan tan samrath ho bhi koi tan tan samrath rakh liyo nirgun natha heir dar ke nath mainu ਜੇ ਆਪ ਜਨਾਈ ਜੇ ਤਾਂ ਆਪ ਸਭ ਕੁਝ ਸਮਝਾਇਆ ਜਨਾਇਆ ਨਾਨਕ ਤੇ ਮਤ ਆਈ ਉਹਦੇ ਅੰਦਰ ਮਤ ਪ੍ਰਗਟ ਹੋਈ ਹੈ ਗੁਰਮਤ ਉਹਦੇ ਅੰਦਰ ਹੋਈ ਜਾਗੀ ਹੈ ਮਤ ਮਤ ਸੁਤੀ ਉਹ ਨਹੀਂ ਜਾਗੀ ਹੈ ਜਿਹਨੂੰ ਤਾਂ ਆਪ ਜਗਾਇਆ ਹੈ ਜਿਹਨੂੰ ਆਪ ਜਨਾਇਆ ਹੈ ਤੂੰ ਜਗਾਏ ਸੋਈ ਚੱਲ ਜਾਂਦੇ ਹਰ ਕੋਣ ਸਾਡੀ ਜੇ ਸਬਜਾ ਆਇਆ ਸੋ ਬੁਝ ਆਪ ਹੀ ਬੁਝਾਵੇਂ ਫਿਰ ਅੰਦਰ ਲੈ ਰੁਕੇ ਆਪਣੇ ਰੂਪ ਪਾਣੀ ਸੰਭਾ ਬਾਵਲ ਨਾ ਸੰਭਵ ਨਹੀਂ ਹੈ ਹਾਂਜੀ ਠੀਕ ਦੀ ਸਮਾਪਤੀ ਹੈ ਜੀ ਕਬੀਰ ਸਾਹਿਬ ਨੇ ਕਿਹਾ ਸੀ ਕਿ ਦੁਰਮਤ ਨੂੰ ਸਭ ਤੋਂ ਪਹਿਲਾਂ ਜਾਣਨਾ ਪਊਗਾ ਉਹੀ ਜੇ ਦੁਰਮਤ ਜਾਣੀ ਗੁਰੂ ਸਾਹਿਬ ਕਹਿੰਦੇ ਫਿਰ ਉਹ ਸੱਚ ਪਛਾਣਦਾ ਹੈ ਜਿਹੜਾ ਸੱਚ ਪਛਾਣਦਾ ਉਹ ਫਿਰ ਇੱਕ ਹੋ ਜਾਂਦਾ ਹੈ ਹੋ ਗਿਆ ਏ ਦੁਰਮਤ ਜਾਨ ਪਰੇ ਜੋਰ ਹੈ ਜੀ ਯਈ ਅੱਖਰ ਤੋਂ ਸੰਸਾਰ ਦੁਰਮਤ ਦੇ ਹੱਕਕਿਆ ਹੈ ਦੁਰਮਤ ਦੇ ਖਿਲਾਫ ਨੇ ਠੀਕ ਹੈ ਜੀ ਇੱਥੇ ਯਈ ਅੱਖਰ ਦਾ ਉਪਦੇਸ਼ ਸਮਾਪਤ ਹੈ ਜੀ